ਪਬੈ ਪਵਜਲ ਡੁੱਬੋ ਹੋ ਮੂੜੇ ਮਾਇਆ ਵਿੱਚ ਗੁਲਤਾਨ ਭਇਆ ਅਬੈ ਪਪਾ ਅਖਰ ਹੈ ਨਾ ਪਵਜਲ ਦੇ ਵਿੱਚ ਡੁੱਬ ਗਿਆ ਤੂੰ ਡੁੱਬ ਜਾਏਗਾ ਡੁੱਬਿਆ ਹੋਇਆ ਹੀ ਹੈ ਡੁੱਬਿਆ ਹੀ ਰਹੇਗਾ ਕਿਉਂਕਿ ਮਾਇਆ ਵਿੱਚ ਗੁਲਤਾਨ ਹੈ ਤੂੰ ਉਹ ਮਾਇਆ ਵਾਸਤੇ ਰਿਸ਼ਤਿਆਂ ਵਾਸਤੇ ਜਿਹੜੇ ਖਾਲਸਾ ਦਾ ਮਿਧਾਨਾ ਲਾਉਦੇ ਨੇ ਮਾਇਆ ਘਠੀ ਕਰਨ ਵਾਸਤੇ ਲਾਉਦੇ ਉਹਨਾਂ ਨੂੰ ਪਤਾ ਖਾਲਸਾ ਕਿੱਥੇ ਬੜਨ ਦੀ ਦਾਸੀ ਬਣਾਉਣਾ ਉਹਦਾ ਪੈਸੇ ਕੱਟੇ ਕਰਦੇ ਸੀ ਉਹਨਾਂ ਨੇ ਇਹਦੇ ਲੋਤੇ ਲੋਕਾਂ ਨੂੰ ਬਣਾਉਣਾ ਬਣਾਉਣਾ ਦੇਖਿਆ ਨਹੀਂ ਉਹਨਾਂ ਨੂੰ ਖੁਦ ਵੀ ਪਤਾ ਇੱਕ ਸਰਪੰਚੀ ਦਾ ਉਹਨਾਂ ਦਾ ਬਣਦੀ ਸੀ ਕਿਤੇ ਕਿ ਕੇ ਨਾਲਾ ਲਾਉਣ ਦਿੰਦੀ ਹੈ ਉਹ ਮਾਇਆ ਦੇ ਵਿੱਚ ਗੁਲਤਾਨ ਦੇ ਮਾਇਆ ਕੱਢੇ ਕਰਨ ਵਾਸਤੇ ਤਬ ਤਵਜਲ ਊੜਾ ਊੜਾ ਮਾਇਆ ਵਿੱਚ ਗੁਲਤਾਨ ਪਿਆ ਡੁੱਬੋ ਹਮੂੜੇ ਆ ਡੁੱਬੇ ਡੁੱਬੇ ਦਾ ਦੇ ਵਿੱਚ ਤੂੰ ਵਾਇਆ ਵਿੱਚ ਗੁਲਤਾਨ ਜਿਹੜੇ ਲੋਕਾਂ ਨੇ ਭਾਇਆ ਇਕੱਠੀ ਕਰੀ ਹੈ ਉਹ ਸਾਰਿਆਂ ਦਾ ਲਾਪੂ ਹੈ ਇਹ ਗੱਲ ਏਕ ਘੜੀ ਮਹਿ ਪਿਆ ਗੁਰ ਪ੍ਰਸਾਦੀ ਜਾਣ ਕਿਰਪਾ ਹੋਵੇ ਗੁਰ ਕਿਰਪਾ ਜੰਤਰ ਆਤਮਾ ਦੀ ਸੁਣ ਆਵਾਜ਼ ਨੂੰ ਸੁਣੇ ਇੱਕ ਕੀ ਹੈ ਉਹਨੂੰ ਤੂੰ ਜਾਣ ਲਵੇ ਇੱਕ ਜਿਹੜਾ ਹੈ ਇੱਕ ਵਾਰੇ ਤੈਨੂੰ ਗਿਆਨ ਹੋ ਜਵੇ ਫਿਰ ਤੂੰ ਸਮਝ ਗਿਆ ਫਿਰ ਤਰ ਗਿਆ ਇੱਕ ਨੂੰ ਜਾਣਣ ਦੀ ਬਜਾਏ ਮਾਇਆ ਵੱਲ ਧਿਆਨ ਦੇ ਆਤਮ ਧਿਆਨ ਦੀ ਬਜਾਏ ਮਾਇਆ ਦਾ ਧਿਆਨ ਹੈ ਆਤਮ ਧਿਆਨ ਦੀ ਬਜਾਏ ਸਰੀਰ ਦਾ ਧਿਆਨ ਹੈ ਦਾ ਸਰੀਰ ਦੇ ਵਿੱਚ ਮਾਇਆ ਦਾ ਧਿਆਨ ਉਹਨਾਂ ਦਾ ਮਾਇਆ ਦਾ ਧਿਆਨ ਸਰੀਰ ਵਾਸਤੇ ਸਭ ਕੁਝ ਹੈ ਬਾਇਕਾਰਾਂ ਇਹ ਬੋਸ ਆਇਐ ਸੋ ਹਿਸਤ ਕੋਠੀ ਸਭ ਸਰੀਰ ਵਾਸਤੇ ਜਿਦਾਂ ਖਾਣਾ ਸਭ ਸਰੀਰ ਵਾਸਤੇ ਦਾ ਸਰੀਰ ਨਾਲ ਜਾਂਦਾ ਇਹਨੂੰ ਸੱਤ ਨਾਲ ਜਾਂਦਾ ਜੇ ਆਤਮ ਚੱਲਣਾ ਉਹਦੇ ਉੱਤੇ ਧਿਆਨ ਕੋਈ ਨਹੀਂ ਆਤਮ ਰਸ ਦਾ ਕੋਈ ਧਿਆਨ ਨਹੀਂ ਆਤਮ ਰਸ ਕਿਥੋਂ ਹੋਣਾ ਉਹਦਾ ਆਤਮ ਦਾ ਕੌ ਜਾਣਦਾ ਹੀ ਨਹੀਂ ਸਰੀਰ ਦੇ ਰਸਤਾ ਛੱਡਦੇ ਨੇ ਆਤਮ ਰਸ ਕੋਈ ਜਾਂਣਾ ਆਤਮ ਗਿਆਨ ਹੈ ਦੀ आत्म ध्यान है दी आत्म रस है दी इक थूमेले ਦਿੱਤੇ मेरा तेडे ते चीजो हर जस्तो मिल लियो छियो आजो गुरबानीए इत्थों मिल लियो छियो गुरबानी ਨਾਲ ਤਾਂ ਲਿੰਕ ਕੋਈ ਨਹੀਂ ਹੈ ਕਿਸੇ ਦਾ गुरबानी ਤਾਂ ਉਹ ਭੂਰੇ ਰੱਖੀ ਹੋਈ ਆ ਕਦੇ ਵਾਸਤੇ ਪਰਪੰਚ ਵਾਸਤੇ ਭੂਰੇ ਰੱਖ ਕੇ ਗੁਰਬਾਨੀ ਨੂੰ ਪਰਪੰਚ ਨੂੰ ਕਰ ਲੈ ਰਹੇ ਰਾਖਾ ਰਹੇ ਨੇ ਸਾਰੇ ਪ੍ਰਬੰਧ ਗੋਲਕ ਦੇ ਵਾਸਤੇ ਪ੍ਰਬੰਧ ਨੇ ਹੋਰ ਤੋਂ ਬਦ ਭੀੜ ਕਵੇ ਇਕੱਠੀ ਹੋਵੇ ਗੁਰਦਾਰੇ ਵਿੱਚ। ਗੋਲਕ ਬੱਦ ਦੇ ਬੱਦ ਕਵੇ ਆਵੇ। ਆਈ ਟਾਰਗੇਟ ਹੈ ਤੇ ਟਾਰਗੇਟੇ ਕੋਈ ਨਹੀਂ ਇਹ ਨਹੀਂ ਹੈ ਵੀ ਜੀਵਨ ਕਿਵੇਂ ਬਦਲੇ। ਦੁਨੀਆਂ ਨੂੰ ਅਸੀਂ ਕੀ ਦੇ ਰਹੇ ਹੋ? ਸਿੱਖੀ ਵਾਲ ਨੂੰ ਕਿੰਨਾ ਪ੍ਰੇਰਿਤ ਕਰ ਰਹੇ ਹੋ? ਜੀਵ ਨੂੰ ਚੱਕ ਕਿੰਨੇ ਲੋਕਾਂ ਦਾ ਚੱਕ ਰਹੇ ਆ ਆਪਣਾ ਜਿਆਦਾ ਪੋਲਿਟੀ ਦੂਏ ਦਾ ਕੀ ਚੱਕਣ। ਜਿਵੇਂ ਅੱਜ ਕੱਲ੍ਹ ਅਸੀਂ ਮਾਰੇਗਾ ਦੇ ਜੀਵਨ ਉੱਤੇ ਚੱਕਦਾ ਸਾਡਾ ਨਜ਼ਰ ਆਉਣ ਲੱਗ ਜੂਗਾ ਲੋਕਾਂ ਨੂੰ ਫਿਰ ਸਾਨੂੰ ਕਹਿ ਦੇਣਗੇ ਕੋਈ ਹੋਰ ਅੰਦੋਲਨ ਚ ਲੋਕਾਂ ਦਾ ਹੋੜ ਬਹੁਤ ਹੈ ਤਾਂ ਕਿ ਸਾਡੂ ਨਾ ਕਹਿ ਸਕਣ ਅਸੀਂ ਕ腐ਪਟਾ ਸਾਰਿਆਂ ਨੂੰ ਕ腐ਪਟ ਕਰ ਜੇ ਬਿਤੇ ਸਿਰ ਤੋਂ ਪ੍ਰਧਾਨ ਮੰਤਰੀ ਕ腐ਪਟ ਹੈ ਜਾਂ ਕੋਈ ਫੋਬਨੇਸਰ ਕ腐ਪਟ ਹੈ ਅੱਜ ਇਹ ਜਿਹੜੇ ਡੇਰੇ ਦੇ ਬ੍ਰਿਗੇਡਰ ਕ੍ਰਾਪਟ ਨੇ ਐਮਐਲਏ ਕ੍ਰਾਪਟ ਨੇ ਅਫਸਰ ਕ੍ਰਾਪਟ ਨੇ ਸਰਪੰਚ ਤੱਕ ਥੱਲੇ ਤੱਕ ਪੰਚਾਇਤ ਕ੍ਰਾਪਟ ਕਰ ਦੋ ਉਹ ਬੋਲਿਆ ਨਾ ਸਕੜੂ ਕಲ್ಯਾਨ ਵਾਲੇ ਉਹੜੀ ਬੰਦ ਹੋ ਜਵੇ ਜੀ ਅਗਲੀ ਨੂੰ ਆਪਣੇ ਬਾਰੇ ਕੀ ਕਰਦੇ ਆਪ ਤੋਂ ਵੀ ਬੋਲਿਆ ਨਾ ਸਕੇ ਕੋਈ ਗੱਲ ਇੱਕ ਘੜੀ ਮੈਂ ਪਾਰ ਪਿਆ ਘੜੀ ਦੇ ਵਿੱਚ ਪਾਰ ਪਿਆ ਭਗਜਲ ਤੋਂ ਫੌਜਾਦਰ ਦੇ ਵਿੱਚ ਤਾਨੂੰ ਨਹੀਂ ਚੱਲ ਲੱਗਦਾ। ਤਾਨੂੰ ਕੋ ਚੱਲ ਨਹੀਂ ਲੱਗਦਾ, ਬਾਲੂ ਬਲੌਡ ਨੂੰ ਚੱਲ ਲੱਗਦਾ। ਜੀ। ਪਰ ਦੂਬ ਲੌਡ ਨੂੰ ਚੱਲ ਲੱਗਦਾ ਹੈ ਤੇ ਪਟਣਾ ਪਟਣਾ ਯੋਖ ਹੈ। ਦੂਏ ਪਾਸੇ ਪੱਟੇ ਵੀ ਹੁੰਦਾ ਹੈ। ਤੇਰ ਛੱਡਦਾ ਹੀ ਨਹੀਂ ਹੈ। ਤੇਰ ਕੁੜੀ ਛੁੱਟ ਜਾਂਦੀ ਹੈ ਤਾਂ ਦਸੂਬਰ ਦਾ ਖੁੱਲ ਜਾਂਦਾ। ਛੱਡਦਾ ਨਹੀਂ ਤੇਰ ਕੁੜੀ।